ਚਲੋਕ ਮਹਲਾ ਤੀਜਾ ਆਸਾ ਅੰਦਰ ਸਭ ਕੋ ਕੋਈ ਨਿਰਾਸ਼ਾ ਹੋਏ ਨਾਨਕ ਜੋ ਜੀਵਿਆ ਸਹਿਲਾ ਆਇਆ ਸੋਈ ਆਸਾ ਅੰਦਰ ਸਭ ਕੋ ਸਾਇਆ ਦੇ ਅੰਦਰ ਇੱਛਾ ਹੈ ਜਿਦਾਂ ਇੱਛਾ ਕੋਈ ਹੈ ਤਦ ਕੋਈ ਇੱਛਾ ਤੋਂ ਰਹਿ ਤਦ ਨਿਰਾਸ਼ਾ ਕੋਈ ਬਿਲ੍ਹਾ ਕੋਈ ਨਿਰਾਸ਼ਾ ਹੋਏ ਕੋਈ ਬਿਲ੍ਹਾ ਆਸਾ ਤੋਂ ਉੱਪਰ ਉੱਠਦਾ ਸੰਸਾਰ ਇੱਛਾ ਤੋਂ ਇੱਛਾ ਤੋਂ ਰਾਤ ਕੋ ਵੱਲ ਆਉਂਦਾ ਹੈ। ਨਾਨਕ ਜੋ ਮਰ ਜੀਵਿਆ ਪਹਿਲਾ ਜੋ ਮਰ ਕੇ ਜੀਵੇ ਜੋ ਇੱਛਾ ਛੱਡ ਕੇ ਆਪਣੀ ਜਿਹਨੂੰ ਇੱਛਾ ਛੱਡ ਦੋ ਮਰ ਜਾਂਦਾ ਜਾਂ ਨਾਮ ਨਾ ਫਿਰ ਉਹ ਹੋ ਜਾਂਦਾ। ਸੰਸਾਰ ਦੀ ਇੱਛਾ ਛੱਡ ਨਾ ਮਰਨ। ਸੰਸਾਰ ਦੀ ਭੁੱਖ ਤੇ ਅਦਨਾ ਮਰਨ। ਆਪ ਦੀ ਭੁੱਖ ਪੂਰੀ ਹੋ ਜਾਣੀ ਝੋੜੇ। ਉਹ ਮਰ ਜੀਵਾ ਹੋਵੇ। ਉਹ ਮਰ ਜੀਵਾ ਮਰ ਕੇ ਜੀਉਂਦਾ ਹੋ ਜਾਂਦਾ। ਆਸਾ ਮੁਕਤ ਹੋਣ ਨੂੰ ਮਰਿਆ ਕਹਿਣਾ ਜਾਂਦਾ ਹੈ। ਇਹ ਬਿਲਕੁਲ ਸਾਰੇ ਜੋਗੀ ਵੀ ਆਈ ਵੰਦ ਨੇ ਸਾਰੇ ਬੰਦੇ ਨੇ ਸਾਨੂੰ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸ਼ਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਪੁਲਾਏ ਸੋਈ ਨਾ ਕਿਛ ਆਸਾ ਹੱਥ ਹੈ ਵਿਆਸਾ ਰੱਖੀਏ ਵੀ ਉਹਦੇ ਹੱਥ ਜੀ ਵੇ ਕੀ ਹੈ ਉਹ ਕਦਾ ਪੂਰੀ ਹੋ ਨਾ ਕਿਛ ਹੋਏ ਸਰ ਵੀ ਨਰਾਸਾ ਕੋ ਉੱਗ ਲਿਆ ਹੁ ਤਾਂ ਕਿ ਆਸਾ ਚ ਮੰਦਾ ਕੁਝ ਨਹੀਂ ਨਿਕਲੂ ਕੁਝ ਨਹੀਂ ਸਾਰੇ ਜਾਣਦੇ ਨੇ ਤੇ ਇਹੇ ਕੋ ਬਿਲ ਕਰੇ ਇਹ ਬਪੜੀ ਹਾਂ ਸੋਏ ਇਹ ਬਪੜੀ ਵੀ ਕੀ ਕਰੇ ਉਹ ਆਪੇ ਭਲਾ ਦਿੰਦਾ ਵੀ ਆਸਾ ਕਰ ਲੈ ਕੋਈ ਛੇੜ ਕੰਮ ਪੜੇ ਜਾਵੇ ਐ ਕਬ ਦੀ ਇੱਛਾ ਤਾਲ ਲੋ ਛੇੜ ਪ੍ਰਾਪਤੀ ਹੋਏ ਜਾਵੇ ਛੇੜ ਦੀ ਪ੍ਰਾਪਤੀ ਜਿਹੜੀ ਉਹ ਫੇਰ ਆਸਾ ਵੱਲ ਆ ਦਿੰਦੀ ਹੈ ਭੁੱਲ ਕੇ ਇਹ ਬੱਪੜੀ ਕੌਣ ਹੈ ਜੀ ਇਹ ਇਸਤਰੀਵਾਚਕ ਕਿਉਂ ਲਿਖਿਆ ਬੱਪੜੀ ਗੁੱਦੀ ਅੱਛਾ ਜੀ ਬੁੱਢੇ ਵਿਚਾਰੇ ਕੀ ਕਰੇ ਇਹ ਕਿਾ ਫੇਰ ਢਾਲ ਲਦਦੀ ਹੈ ਅੱਛਾ ਢਾਲ ਭੁਲਾਇਆ ਕਿਨੇ ਇਹਨੂੰ ਭੁਲਾਇ ਸੋਏ ਕੌਣ ਹੈ ਜੀ ਭੁਲਾਇਆ ਨਾ ਬੂੜੇ ਬੁਲਾਉਂਦਾ ਅੱਛਾ ਜੀ ਉਹ ਆਪਣੀ ਡਿਊਟੀ ਨਹੀਂ ਕਰ ਰਹੇ ਹਨ ਕਹਿੰਦਾ ਚਲੋ ਜਾ ਲੈ ਕਹਿੰਦੇ ਖਾ ਦੇਖ ਲਓ ਸੋਨੇ ਦਾ ਮਿਲਗਾ ਸ਼ਾਇਦ ਆ ਥਾਏਗਾ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਰ ਇਹ ਧਨ ਤ੍ਰਿਗ ਜੀਵਨ ਸੰਸਾਰ ਤੁਸਾਂ ਦਾ ਜੀਵਨ ਤ੍ਰਿਗ ਸੱਚੇ ਨਾਮ ਬਿਨ ਜਿਹੜਾ ਜੀਵਨ ਜਿਉਂ ਨਾਮ ਦੀ ਪ੍ਰਾਪਤੀ ਤੋਂ ਬਿਨੋ ਉਹਦਾ ਤਾਂ ਜੀਵਨ ਕੋਈ ਫਾਇਦਾ ਨਹੀਂ ਉਹਦਾ লাভ ਨਹੀਂ ਪ੍ਰਭ ਦਾਤਾ ਦਾਤਾਰ ਦੇਖਿਨ ਇਹ ਧਨ ਪ੍ਰਭ ਦਾਤਾ ਦਾਤਾਰ ਦੇ ਵਾਲਾ ਦਦਾ ਰੰਦਾ ਹਰ ਵਕਤ ਔਰ ਉਹ ਧੰਨ ਦੇ ਜਲੇ ਫੇਰ ਵੀ ਉਹ ਧੰਨ ਵਾਸਤੇ ਨਹੀਂ ਤਨ ਤਨ ਵਾਸਤੇ ਅਸੀਂ ਜੀਵਨ ਦੀ ਜੀਆ ਜੇਕਰ ਵਾਕਈ ਮਿਲ ਸਕਦਾ ਹੈ ਤਾਂ ਉਹ ਦਿਲਵਾ ਆਪ ਹੈ ਹੋਰ ਕਿਸੇ ਦੀ ਜਾਣਦੇ ਹੋ ਵੀ ਮਿਲ ਜਾਂਦਾ ਹੁੰਦਾ ਨਾ ਅਬ ਇਹ ਤਾਂ ਲੱਗਿਆ ਕਿ ਨਾ ਕੋਈ ਐਸਾ ਜਿਹਨੂੰ ਨਾ ਮਿਲਿਆ ਹੋਵੇ ਹਾਂ ਉਹਦੇ ਹੀ ਲੱਗਣ ਜੋ ਉਹਦੀ ਇੱਛਾ ਕੇ ਫਰਕ ਪੈ ਗਿਆ ਹੋਵੇ ਫਿਰ ਉਹਦੀ ਉਲਕੀ ਉਹਦੀ ਬੇਸਲਾ ਹੋ ਗਈ ਹੋਵੇ ਸਰਬਲੋ ਬ੍ਰੋਮਣੇ ਦਿਨ ਜੂਲ ਮੈਂ ਇਹੋ ਲੇ ਕਿ ਹਾਂਜੀ ਸਾਸ ਸਾਸ ਆਰਾਧੇ ਨਿਰਮਲ ਸੋਏ ਜਨ ਰਸਨਾ ਏਕਪਨ ਉਹ ਜਨ ਸਾਥ ਸਾਥ ਆਰਾਧੇ ਨਿਰਮਲ ਸੋਏ ਜਨ ਐਸੇ ਨਿਰਮਲ ਜਨ ਜਿਹੜੇ ਹਮ ਤੇ ਨੇ ਲੋਕタル ਵੀ ਪ੍ਰਾਪਤੀ ਵਾਲੇ ਤੇ ਹੀ ਰੱਖਣ ਵਾਲੇ जीवन ਦੇ ਵਿੱਚ ਇਛੇਵਰ ਉਤਨ ਵਾਸਤੇ ਜੀਵਨ ਜਿਉਣ ਵਾਲੇ ਆਜ ਵੀ ਕੈਸੇ ਸਾਥ ਸਾਥ ਆਰਾਧਨ નિર્ਵਲ ਹੋਏ ਜਾਣ ਅਗਮ ਰਸਨਾ ਇੱਕ ਪੜ ਉਹ ਜਾਂ ਵੀ ਜਾਣਦਾ ਸਭੀ ਤੋਂ ਪਰੇ ਸਾਡੀ ਤੋਂ ਉਹਦੀ ਸੋਚ ਵੀ ਸਾਡੀ ਬੁੱਧੀ ਤੋਂ ਪਰੇ ਉਹ ਜਾਣਦਾ ਸਾਡੇ ਬਾਰੇ ਅਸੀਂ ਉਹਦੇ ਬਾਰੇ ਨਹੀਂ ਜਾਣ ਰਸਨਾ ਇੱਕ ਪੜ ਉਹ ਰਸਨਾ ਇੱਕ ਕਰਸਨਾ ਹੋ ਕੇ ਉਹਦਾ ਉਚਾਲ ਲੋਭ ਨਾਲ ਚੈਦਾ ਇੱਕ ਕਰਸਨਾ ਨਾਲ ਉਹਦਾ ਗੁਣ ਕਰਦਾ ਤਾਂ ਚੈਦਾ ਇੱਕ ਕਰਸ ਹੋ ਕੇ ਜਦੋਂ ਦੋ ਹੋ ਜਾਂਦੇ ਕਰਦੇ ਨੇ ਗੁਣ ਮਾਇਆ ਪਿੱਛੇ ਪ੍ਰਾਪਤੀ ਮਾਇਆ ਦੀ ਹੁੰਦੀ ਹੈ ਪਿੱਛੇ ਪ੍ਰਾਪਤੀ ਕਿਸੇ ਹੋਰ ਦੇ ਦੀ ਹੁੰਦੀ ਹੈ ਪ੍ਰਾਪਤੀ ਕੋਈ ਛੇੜਦੀ ਹੁੰਦੀ ਹੈ ਕਿਸੇ ਹੋਰ ਪੁੱਤਰ ਦੀ ਹੁੰਦੀ ਹੈ ਧੰਦੀ ਹੁੰਦੀ ਹੈ ਦੁਨਿਆਵੀ ਪ੍ਰਾਪਤੀ ਜਿਹੜੀ ਦੁਨਿਆਵੀ ਇੱਛਾ ਜਿਹੜੀ ਕਿਸੇ ਬਦਾਲ ਸਕੀ ਕਾਲ ਗੱਡ ਕੋਈ ਹੋਵੇ ਨਾ ਠੀਕ ਚੱਲੋ ਉਹ ਕੋਈ ਰਾਜ਼ ਰਦੀਓ ਰਸਨਾ ਇੱਕ ਤੋਂ ਭਾਵ ਹੈਗਾ ਵੀ ਉਹ ਤੁਹਾਨੂੰ ਬਰਾਤੀ ਹੋਇਆ ਚਾਹੋਵੇਂ ਜੇ ਤਾਂ ਵੀ ਦੀ ਇੱਛਾ ਨੂੰ ਹੋਜੀ ਰੱਬ ਰਹਾ ਸਰਬੱਤ ਨਾਨਕ ਬਲ ਜਾਈ ਨਾਨਕ ਕੁਰਬਾਨ ਜਾਂਦਾ ਹੈ ਕਿ ਸਰਬੱਤਨ ਵਿੱਚ ਰੱਬ ਰਹਾ ਸਾਰਿਆਂ ਵਿੱਚ ਰੱਬ ਅੱਛਾ ਜੀ ਇਹਦਾ ਕਾਫੀ ਆ ਫੇਰ ਆਪਣੀ ਉਸ ਪਹਿਲੀ راہ ਵਾਲੀ ਪੰਕਤੀ ਨਾਲ ਮਿਲਦਾ ਇੱਥੇ 20ਵੀਂ ਪਾੜੀ ਸਮਾਪਤੀ ਹੈ ਜੀ